ਕਰਾਂਗੇ ਸੇਤੂ ਬਦਾਸਨ ਇਸ ਨਾਲ ਗਰਦਨ ਮੋਢੇ ਬਾਹਾਂ ਪੋਣੀਆਂ ਹਰਕਾਂ ਤਲੀਆਂ ਅਤੇ ਗੋਡੇ ਗੱਟਿਆਂ ਦੀਆਂ ਦਰਦਾਂ ਠੀਕ ਹੁੰਦੀਆਂ ਹਨ ਇਸ ਨਾਲ ਸਰੀਰ ਵਿੱਚ ਮਜ਼ਬੂਤੀ ਆਉਂਦੀ ਹੈ ਅਤੇ ਯਾਦਦਾਸ਼ਤ ਵੀ ਵਧਦੀ ਹੈ ਗੋਡੇ ਖੜੇ ਕਰ ਲਓ ਦੋਹਾਂ ਹੱਥਾਂ स्वास ਚੱਲਦਾ रहेगा, ਸਵਾਸ ਤੇ कोई ਕੰਟਰੋਲ नहीं करना। वापस, हौली हौली वापस। एक ਵਾਰ फिर दो ਅੱਖਾਂ ਦਾ ਸਹਾਰਾ ਦਿੰਦੇ ਕਮਰ ਨੂੰ ਚੂੜਿਆਂ ਨੂੰ ਜ਼ਮੀਨ ਤੋਂ ਵੱਧ ਤੋਂ ਵੱਧ ਉੱਪਰ ਉਠਾ ਦਿਓ ਨਾਰਮਲ ਸਵਾਸ ਚੱਲਦਾ ਰਹੇਗਾ ਵਾਪਸ ਹੌਲੀ-ਹੌਲੀ ਵਾਪਸ ਦੋਵੇਂ ਲੱਤਾਂ ਸਿੱਧੀਆਂ ਕਰ ਲਓ ਸਰੀਰ ਇੱਕਦਮ ਸ਼ਾਂਤ ੱੱਲਾ ਬਾਲ ਮਚਨ ਕਰਨ ਜਾ ਰਹੇ ਹਾਂ ਇਹ ਗੈਸ ਮੋਟਾਪਾ ਲੱਤਾਂ ਬਾਹਾਂ ਤੇ ਗੋਡਿਆਂ ਦੀਆਂ ਦਰਦਾਂ ਵਾਸਤੇ ਬਹੁਤ ਹੀ ਲਾਭਕਾਰੀ ਹੈ ਬਾਲ ਮਚਨ ਇੱਥੇ ਸਵਾਸ ਨਾਰਮਲ ਚੱਲਦਾ ਰਹੇਗਾ ਸਵਾਸ ਤੇ ਕੋਈ ਕੰਟਰੋਲ ਨਹੀਂ ਕਰਨਾ ਹੁਣ ਦੋਵੇਂ ਪੈਰ ਉਠਾ ਕੇ ਸਾਈਕਲ ਦੀ ਤਰ੍ਹਾਂ ਦੋਆਂ ਲੱਤਾਂ ਨੂੰ ਚਲਾਓ ਨਾਲ ਸਿਰ ਉਠਾ ਕੇ ਦੋਹਾਂ ਹੱਥਾਂ ਨਾਲ ਵੀ ਸਾਈਕਲ ਚਲਾਓ ਅਤੇ ਨਾਲ ਹੀ ਖਿੜਖੜਾ ਕੇ ਹੱਸੋ ਬਾਕ ਬਾਕ ਦੋਵੇਂ ਕਾਸ਼ਦੀਆਂ ਹੱਥ ਲੈ ਲੈ ਆਓ ਸਰੀਰ ਨੂੰ ਇੱਕਦਮ ਸ਼ਾਂਤ ਕਰ ਦਿਓ ਪੈਰਾਂ ਦਾ ਫਾਸਲਾ 1.5 ਤੋਂ 2 ਫੁੱਟ ਹੱਥਾਂ ਦੀਆਂ ਤੜੀਆਂ ਦਾ ਰੁਖ ਆਸਮਾਨ ਦੀ ਤਰਫ ਸ਼ਵਾਸਾਂ ਅੱਖਾਂ ਕੋਮਲਤਾ ਨਾਲ ਬੰਦ ਕਰਾਂਗੇ ਸਰਵਾਂਗਾਸਨ ਦੋਹਾਂ ਤਰ੍ਹਾਂ ਆਸਮਾਨ ਦੀ طرف ਲੈ ਜਾਓ ਕਮਰ ਨੂੰ ਦੋ ਹੱਥਾਂ ਦਾ ਸਹਾਰਾ ਦਿੰਦੇ ਹੋਏ ਸਾਰਾ ਤੱਕ ਆਸਮਾਨ ਦੀ طرف چلا ਜਾਏ ਕੇਵਲ ਜ਼ਮੀਨ ਤੇ ਦੋਵੇਂ ਅਰਕਾਂ ਮੋਢੇ ਅਤੇ ਸਿਰ ਦਾ ਪਿਛਲਾ ਪਾਗ ਹੀ ਲੱਗਾ ਰਹੇਗਾ ਨਾਰਮਲ ਸਵਾਸ ਸਵਾਸ ਚਲਦਾ ਰਹੇ ਤੇ ਕੋਈ ਕੰਟਰੋਲ ਨਹੀਂ ਕਰਨਾ ਸਰਵਾਂਗਾਸਨ ਸਰਵਾਂਗ ਆਸਨ ਨਾਲ ਯਾਦ ਆਸ਼ਵਧੀ ਹੈ ਦਿਮਾਗ ਨੂੰ ਖੂਨ ਦਾ ਦੌਰਾ ਜਿਆਦਾ ਪਹੁੰਚਦਾ ਹੈ ਅੱਖਾਂ ਦੀ ਰੋਸ਼ਨੀ ਵਾਸਤੇ ਵੀ ਬਹੁਤ ਹੀ ਫਾਇਦੇਮੰਦ ਹੈ ਸਰਵਾਂਗ ਆਸਨ ਸਭ ਆਸਨਾਂ ਦਾ ਰਾਜਾ ਆਸਨ ਮੰਨਿਆ ਗਿਆ ਹੈ ਯਾਦ ਆਸ ਨੂੰ ਤੇਜ਼ ਕਰਨ ਵਾਸਤੇ ਹੋਲੀ ਹੋਲੀ ਵਾਪਸ ਹੋਲੀ ਹੋਲੀ ਵਪ ਹੁਣ ਕਰਨ ਜਾ ਰਹੇ ਹਾਂ ਹਲਾਸਨ ਪੇਟ ਦੇ ਮੋਟਾਪੇ ਲਈ ਸ਼ੂਗਰ ਲਈ ਯਾਸ਼ਕਤੀ ਅਤੇ ਗੁਰਦੇ ਤੇ ਫੇਫੜਿਆਂ ਸੰਬੰਧੀ ਰੋਗਾਂ ਲਈ ਬਹੁਤ ਹੀ ਫਾਇਦੇਮੰਦ ਹੈ ਇਹ ਹਲਾਸਨ ਇਹ ਸਿਰ ਸਵਾਸ ਬਾਹਰ ਰਹੇਗਾ ਦੋ ਹੱਥਾਂ ਦਾ ਕਮਰ ਨੂੰ ਸਹਾਰਾ ਦਿੰਦੇ ਹੋਏ ਦੋਵੇਂ ਪੈਰ ਪਹਿਨੂ ਆਸਮਾਨ ਦੀ ਤਰਫ ਲੈ ਜਾਓ ਹੁਣ ਹੌਲੀ-ਹੌਲੀ ਦੋਹਾਂ ਪੈਰਾਂ ਨੂੰ ਸਿਰ ਦੀ ਸਾਈਡ ਜ਼ਮੀਨ ਵੱਲੋਂ ਚੁਕਾ ਦਿਓ ਸਵਾਸ ਬਾਹਰ ਵਾਪਸ ਹੌਲੀ-ਹੌਲੀ ਵਾਪਸ ਆਪਣੀ ਕਮਰ ਨੂੰ ਜ਼ਮੀਨ ਤੇ ਲਗਾ ਲਓ ਔਰ ਦੋਵੇਂ ਪੈਰ ਹੌਲੀ-ਹੌਲੀ ਜ਼ਮੀਨ ਤੇ ਵਾਪਸ ਲੈ ਆਓ ਅਡੀਆਂ ਜ਼ੋਰ ਦੀ ਜ਼ਮੀਨ ਤੇ ਨਹੀਂ ਮਾਰਨੀਆਂ ਇੱਕ ਵਾਰ ਫੇਰ ਦੋਹਾਂ ਹੱਥਾਂ ਦਾ ਕਮਰ ਨੂੰ ਸਹਾਰਾ ਦਿੰਦੇ ਹੋਏ ਦੋਵੇਂ ਪੈਰ ਆਸਮਾਨ ਵੱਲ ਲੈ ਜਾਓ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਦੋਹੇ ਪੈਰ ਜ਼ਮੀਨ ਵੱਲ ਸਿੱਧੀ ਸਾਈਡ ਚੁਕਾ ਦਿਓ ਸਵਾਸ ਬਾਹਰ ਹਾਲਾਤ ਹੌਲੀ ਹੌਲੀ ਵਾਪਸ ਹੌਲੀ ਹੌਲੀ ਵਾਪਸ ਆਪਣੀ ਕਮਰ ਨੂੰ ਜ਼ਮੀਨ ਤੇ ਲਗਾ ਲਓ ਦੋਵੇਂ ਪੈਰ ਜ਼ਮੀਨ ਦੀ ਸਾਈਡ ਵਾਪਸ ਲੈ ਆਓ ਜਾਨ ਰਹੇ ਹੱਡੀਆਂ ਜੋੜ ਦੀ ਜ਼ਮੀਨ ਤੇ ਨਾ ਵੱਜਣ ਬੜੇ ਹੀ ਹੌਸਲੇ ਨਾਲ ਵਾਪਸ ਆਉਣਾ ਹੈ ਵਾਪਸ ਆਉਣ ਤੇ ਸਰੀਰ ਨੂੰ ਇੱਕਦਮ ਟਿੱਲਾ ਛੱਡ ਦਿਓ ਪੈਰਾਂ ਦਾ ਫਾਸਲਾ 1.5-2 ਫੁੱਟ ਕਰ ਲਓ ਹੱਥ ਵੀ ਥੋੜੇ ਸਰੀਰ ਤੋਂ ਦੂਰੀ ਤੇ ਹੋ ਜਾਣ ਹੱਥਾਂ ਦੀਆਂ ਤਲੀਆਂ ਦਾ ਰੁਕ ਆਸਮਾਨ ਦੀ ਤਰਫ ਰਹੇਗਾ ਮੁਠਾ ਖੁੰਨੀਆਂ ਹੁਮਲ ਤਾਂ ਨਾਲ ਅੱਖਾਂ ਬੰਦ ਕਰ ਲਓ ਸਰੀਰ ਨੂੰ ਇੱਕਦਮ ਸ਼ਾਂਤ ਤੇ ਕਰ ਦਿਓ ਸ਼ਵਾਸਨ ਆਸਣਾ ਦੁਆਰਾ ਇਤਕਾਨ ਨੂੰ ਦੂਰ ਕਰਾਂਗੇ ਅੱਖਾਂ ਬੰਦ ਰਹਿਣਗੀਆਂ ਸਰੀਰ ਇੱਕਦਮ ਸ਼ਾਂਤ ਟਿੱਦਾ ਰਹੇਗਾ ਜਿਸ ਸੰਗ ਦਾ ਮੈਂ ਨਾਮ ਲਵਾਂ ਆਪਣੀ ਸੁਰਤੀ ਨੂੰ ਉਹ ਸੰਗ ਤੇ ਲੈ ਕੇ ਜਾਣਾ ਹੈ ਆਪਣੀ ਸੁਰਤੀ ਨੂੰ ਅੱਖਾਂ ਬੰਦ ਕਰਾ ਹੀ ਖੱਬੇ ਪੈਰ ਤੇ ਲੈ ਜਾਓ ਖੱਬਾ ਪੈਰ ਬਿਲਕੁਲ ਸ਼ਾਂਤ ਇਕਦਮ ਤੇ ਲਾ ਇਸ ਵਿੱਚ ਕੋਈ ਜਿੰਦ ਜਾਨ ਨਹੀਂ ਹੁਣ ਆਪਣੀ ਸੁਰਤੀ ਨੂੰ ਖੱਬੇ ਗੋਡੇ ਤੇ ਲੈ ਆਓ ਖੱਬਾ ਗੋਡਾ ਵੀ ਬਿਲਕੁਲ ਸ਼ਾਂਤ ਆਪਣੀ ਸੁਰਤੀ ਨੂੰ ਖੱਬੇ ਪੱਟ ਤੇ ਲੈ ਆਓ ਸਾਰੀ ਲੱਤ ਪੱਟ ਤੋਂ ਲੈ ਕੇ ਪੈਰ ਤੱਕ ਬਿਲਕੁਲ ਸ਼ਾਂਤ ਦਿੱਲੀ ਹੁਣ ਆਪਣੀ ਸੁਰਤੀ ਨੂੰ ਸੱਜੇ ਪੈਰ ਤੇ ਲੈ ਜਾਓ ਸੱਜਾ ਪੈਰ ਬਿਲਕੁਲ ਸ਼ਾਂਤ ਇਸ ਵਿੱਚ ਕੋਈ ਜਿੰਦ ਜਾਨ ਨਹੀਂ ਹੁਣ ਆਪਣੀ ਸੁਰਤੀ ਨੂੰ ਸੱਜੇ ਗੋਡੇ ਤੇ ਲੈ ਆਓ ਸੱਜੇ ਪੱਟ ਤੇ ਲੈ ਆਓ ਹਾਂ ਇਹ ਸੱਜਿਲਾ ਇੱਕ ਮੁਰਦੇ ਦੇ ਸਮਾਨ ਇਸ ਵਿੱਚ ਕੋਈ ਜਿੰਦ ਜਾਨ ਨਹੀਂ ਕੋਈ ਤਾਕਤ ਨਹੀਂ ਬਿਲਕੁਲ ਬੇਜਾਨ ਹੁਣ ਆਪਣੀ ਸੁਰਤੀ ਨੂੰ ਖੱਬੇ ਹੱਥ ਤੇ ਲੈ ਜਾਓ ਖੱਬਾ ਹੱਥ ਬਿਲਕੁਲ ਢਿੱਲਾ ਹੁਣ ਆਪਣੀ ਸੁਰਤੀ ਨੂੰ ਖੱਬੀ ਅਰਕ ਤੇ ਲੈ ਜਾਓ ਖੱਬੇ ਡੋਲੇ ਤੇ ਲੈ ਜਾਓ ਬੇ ਮੋੜੇ ਤੇ ਲੈ ਜਾਓ ਖਬੀਬਾ ਮੋੜੇ ਤੋਂ ਲੈ ਕੇ ਹੱਦ ਤੱਕ ਬਿਲਕੁਲ ਇੱਕਦਮ ਸ਼ਾਂਤ ਦਿੱਲੀ ਹੁਣ ਆਪਣੀ ਸੁਰਤੀ ਨੂੰ ਸੱਜੀ ਤੇ ਲੈ ਆਓ ਹਜਾਤ ਦੇਖੋ ਬਿਲਕੁਲ ਟਿੱਲਾ ਪੈ ਚੁੱਕਾ ਹੈ ਹੁਣ ਆਪਣੀ ਸੁਰਤੀ ਨੂੰ ਸੱਜੀ ਅਰਖ ਤੇ ਲੈ ਜਾਓ ਆਪਣੇ ਧਿਆਨ ਨੂੰ ਸੱਜੇ ਡੋਲੇ ਤੇ ਲੈ ਜਾਓ ਅੱਜੇ ਮੋੜੇ ਤੇ ਲੈ ਜਾਓ ਸਾਰੀ ਸੱਜੀ ਬਾਹ ਬਿਲਕੁਲ ਸ਼ਾਂਤ ਦਿੱਲੀ ਹੁਣ ਸੁਰਤੀ ਨੂੰ ਆਪਣੇ ਚਿਹਰੇ ਤੇ ਲੈ ਆਓ ਹੁਣ ਆਪਣੀ ਸੁਰਤੀ ਨੂੰ ਆਪਣੇ ਸਵਾਸ ਤੇ ਲੈ ਆਓ ਸਵਾਸ ਅੰਦਰ ਜਾ ਰਿਹਾ ਹੈ ਸਵਾਸ ਬਾਹਰ ਆ ਰਿਹਾ ਹੈ ਕੇਵਲੇ ਇਸੇ ਗੱਲ ਨੂੰ ਅਨੁਭਵ ਕਰਨਾ ਹੈ ਮੈਂ ਹੁਣ ਇੱਥੇ ਹੀ ਆਪਣੇ ਯੋਗਾ ਅਸਣਾਂ ਦੀ ਕਲਾਸ ਨੂੰ ਸਮਾਪਤ ਕਰਦਾ ਹਾਂ ਅਤੇ ਤੁਹਾਡੀ ਤੰਦਰੁਸਤੀ ਦੀ ਮੰਗਲ ਕਾਮਨਾ ਕਰਦਾ ਹੋਇਆ ਤੁਹਾਡਿਆ ਤੋਂ ਆਗਿਆ ਲਵਾਂਗਾ ਨਮਸਕਾਰ ਧੰਨਵਾਦ